ਖੁੱਬੜੀ ਕੁਥਾਂਏ ਮਿੱਠੀ ਗੱਲਣ ਕੁਮੰਤਰੀਆ ਨਾਨਕ ਸੇ ਹੀ ਉੱਭਰੇ ਜਿਨ੍ਹਾਂ ਭਾਗ ਮਥਾਂਏ ਖੁੱਬੀ ਹੋਈ ਜਿਹੜੀ ਸੁੱਤ ਕੁਥਾਂਏ ਬਾਗਾਂ ਦੇ ਵਿੱਚ ਖੁੱਬੀ ਹੋਈ ਆ ਸੰਤਰੀਆ ਗੱਲਾਂ ਬੋਲਤ ਤੇ ਐ ਗੱਲਾਂ ਕੁਮੰਤਰ ਬੰਕਰ ਨਹੀਂ ਐ ਵਾਹਪੁਰ ਗੁਰਬਾਨੇ ਤੋਂ ਗੱਲਾਂ ਉਲਟ ਨੇ ਕੁਮੰਤਰ ਕੁੱਥੀ ਬੱਤ ਦਿਆ ਨੇ ਗੱਲਾਂ ਕਦੇ ਭਾਗ ਦਾ ਉਹ ਹੋ ਜਲੇ ਨਾ ਇਦਾਂ ਹੀ ਕਰਦੇ ਕੋਈ अच्छा जी। कुपड़ा ठाएं कुपड़ा कठाएं ये जगह नहीं है। ओनादा कुठाएं हों लरती है। कुठाएं पेट नो गहने। जड पेट है ना, था था था था था। ना। पेट खातिर जेडे गल्ला करदे ने। अन्न देव दा पानी देव दा फसल देव दा लूल। पाजवा पाया छै सवा पास उबित। हां जी। बाकी फिर कर गडीये तोसा पाइए। वो ठाएं और ओ के है मतलब जैसे ਪੇਟ ਖਾਤਰ ਕਰਦੇ ਨੇ ਲੋਕ ਕਹਿੰਦਾ ਮਤਲਬ ਹੈ ਪੇਟਾਂ ਜਿਹੜੇ ਜੁੜੇ ਹੋਏ ਨੇ ਉਹ ਕਫਾਂ ਖੁੱਬੇ ਹੋਏ ਨੇ ਢਿੱਡ ਦੀ ਭੁੱਖਾ ਉੱਤੇ ਸਭ ਕੁਝ ਪਕਾੜਾ ਕਰਦੇ ਨੇ ਝੂਠ ਬੋਲਦੇ ਨੇ ਪਰਪੱਕ ਕਰਦੇ ਨੇ ਮਿੱਠਾ ਬੋਲਦੇ ਨੇ ਅਰਕਮੰਤਰੀਆਂ ਗੱਲਾਂ ਕਰਦੇ ਪੇਟ ਭਰਿਓ ਪਸ਼ੂਆ ਜਿਉਂ ਸੋਇਓ ਪੇਟ ਭਰਿਓ ਪਸ਼ੂਆ ਜਿਉਂ ਸੋਇਓ ਮਨੁੱਖ ਜਨਮ ਹੈ ਹਾਰਿਓ ਉਹਨਾਂ ਦੀ ਗੱਲ ਹੋ ਰਹੀ ਹੈ ਜੀ ਆਏ ਆ ਉਹ ਇਹਦਾ ਕਿ ਆ ਨਾ ਕਿਸੇ ਨਾਲ ਗਿਆਨ ਵੰਡ ਰਹੇ ਆ ਤੇ ਉਲਟਾ ਗਿਆਨ ਦੇ ਰਹੇ ਆ ਜਿਵੇਂ ਅੱਜ ਕੱਲ ਆਪਣੇ ਆਮ ਪ੍ਰਚਾਰਕ ਦੇ ਰਹੇ ਆ ਉਹਨਾਂ ਦੀ ਗੱਲ ਲੱਗਦੀ ਏ ਮੈਨੂੰ ਤਾਂ ਹਾਂ ਜੀ ਆਏ ਆ ওই ਕਰਦੇ ਤੇ ਲੱਗਿਆ ਮਿੱਠੀਆਂ-ਮਿੱਠੀਆਂ ਗੱਲਾਂ ਦਾ ਮਾਇਆ ਨਾਲ ਜੋੜੀ ਜਾਂਦਾ ਉਲਟ ਪ੍ਰਚਾਰ ਹੈ ਬੇਦਮੇ ਚੇਲੇ ਦੀਏ ਬਹਾਈ ਹਾਂ ਠੀਕ ਹੈ ਜੀ ਨਾਨਕ ਸਹੀ ਉਭਰੇ ਉਹ ਕਿਸਮਤ ਵਾਲੇ ਆ ਭਾਗਾਂ ਵਾਲੇ ਆ ਜਿਹੜੇ ਕੀ ਐਨਾ ਤੋਂ ਗਿਆਨ ਤੋਂ ਬਾਦ ਵੀ ਕਿਰਪਾ ਨਾਲ ਉਤਰ ਕੇ ਉਹ ਬਾਣੀ ਦਾ ਸਾਗੁਰ ਬਾਣੀ ਦਾ ਸੱਚ ਸਮਝ ਗਏ ਜੀ ਆ ਜਿਹੜੇ ਪ੍ਰੇਮ ਦੀ ਭੁੱਖ ਤੋਂ ਉੱਤੇ ਠੀਕ ਹੈ ਜੀ ਜਿੰਨੇ ਪ੍ਰਚਾਰਕ ਆ ਉਹਨਾਂ ਨੂੰ ਇਸ ਗੱਲ ਦਾ ਵਿਚਾਰ ਕਰਨੀ ਚਾਹੀਦੀ ਆ ਵੀ ਉਹਨਾਂ ਦੇ ਪ੍ਰਤੀ ਇਹ ਸ਼ਲੋਕ ਦਰਜ ਹੈ ਦਾ ਬਹੁਤ ਖਿਆਲ ਰੱਖਦੇ ਠੀਕ ਹੈ ਜੀ ਇੱਥੇ 11 ਨੰਬਰ ਸ਼ਲੋਕ ਦੀ ਸਮਾਪਤੀ ਹੈ ਜੀ